ਸੋ ਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਆਂ ਦਿਨ ਹਰਿ ਨੇ ਬੁਲਾਇ ਤੋ ਬ੍ਰਾਹਮਣ ਤਾਂ ਇਹ ਕੀ ਬ੍ਰਹਮ ਤੋਂ ਪੈਦਾ ਹੋਇਆ ਹੋਇਆ ਬੁੱਧਾ ਆਪਣੇ ਆਪ ਬ੍ਰਹਮ ਦੀ ਬੁੱਧਾ ਹੈ ਜੇ ਇਹ ਉਹਦਾ ਸਰੀਰ ਬ੍ਰਹਮ ਤੋਂ ਸਵਜਿਆ ਹੋਇਆ ਤਾਂ ਬ੍ਰਾਹਮਣ ਪਾਲਾ ਜੀ ਤਾਂ ਪੰਚ ਤਨ ਬ੍ਰਾਹਮਣ ਹੋਇਤੀ ਪੰਚਾ ਦੱਤਾ ਨੇ ਸ਼ਰੀਰ ਕਰਕੇ ਬ੍ਰਾਹਮਣ ਨਹੀਂ ਹੋ ਸਕਦਾ ਕਹਿੰਦਾ ਮਤਲਬ ਇਹ ਸਾਰੇ ਕੋਈ ਨਹੀਂ ਗਰਮੋਂ ਬੰਨ ਤੇ ਸਾਰੇ ਹੀ ਆਂਦੀ ਹੈ ਉਹਦਾ ਲੱਗਿਆ ਹੋਊਗਾ ਵਰਸ਼ਾ ਬ੍ਰਾਹਮਣ ਬਰਦਾਸ਼ਤ ਕਰ ਗਿਆ ਬ੍ਰਾਹਮਣ ਅੱਛਾ ਕੱਲ ਇੰਨੀ ਚਕੋਕਤੀ ਕਹ ਕਵਤਾ ਦੇ ਵਿੱਚ ਕਹਤੀ ਕਿ ਪਤਾ ਹੀ ਲੱਗਿਆ ਰੁਕਮ ਕੀ ਕਰਦਾ ਆ ਪੌਣ ਲੁਕਣ ਆਪ ਕਬਲ ਦੀ ਵੇਚੀ ਹੋਈ ਦੀ ਬ੍ਰਾਹਮਣ ਨੇ ਪਰਵਾਸ ਕੀਤੀ। ਉਸ ਕੱਲ ਦੀ ਅਸੀਂ ਪ੍ਰਵਾਹ ਕਰਦੇ ਆ ਹੋ ਜਾ ਗਾਂਦੀ। ਆਪ ਕਰਨ ਨੂੰ ਪਤਾ ਨਹੀਂ ਲੱਗਿਆ ਕੀ ਲਿਖ ਦਿੱਤਾ ਇੱਥੇ। ਤੁਸਾਨੋ ਦੀ ਬਗ ਕੀ ਲਿਖਿਆ ਹੈ ਮਹਾਰਬਾਨੀ। ਬ੍ਰਾਹਮਣ ਨੂੰ ਪਤਾ ਸੀ ਅੰਦਰ ਉਹਦਾ ਖਾਰ ਖੰਦਾ ਸੀ। ਪਰ ਪਤਾ ਵੀ ਸੀ ਵੀ ਭਾਈ ਗੱਲ ਵੀ ਠੀਕ ਹੈਗੇ ਵੀ ਨਹੀਂ ਆ। ਹਾਂਜੀ ਜਿਹੜਾ ਪਹਿਲਾ ਟੀਕਾ ਬਣਾ ਕੀਤਾ ਸੀ ਨਾ ਉਹਨੇ ਡਾਕਟਰ 트ੰਪ ਨੇ ਉਹਨੇ ਇਹ ਗੱਲ ਲਿਖੀ ਹੈ। ਕਿ ਹੈ ਸਭ ਤੋਂ ਜ਼ਿਆਦਾ ਇਹ ਬ੍ਰਾਹਮਣ ਨੂੰ ਸਮਝਾਉਣੀ ਚਾਹੀਦੀ ਸੀ। ਹਾਂ ਇਹ ਬ੍ਰਾਹਮਣ ਆ ਪਰ ਉਹ ਕਹਿੰਦੇ ਕਿ ਉਹਨੂੰ ਐ ਲੱਗਿਆ ਵੀ ਉਹਦੇ ਖਿਲਾਫ ਕੁਝ ਅਜਿਹੀਆਂ ਗੱਲਾਂ ਲਿਖੀਆਂ ਐ ਤਾਂ ਨਾਲ ਖਾਰ ਖਾਂਦਾ ਸੀ। ਉਹ ਸਾਰੀਆਂ ਉਹਦੇ ਠੀਕ ਹੈ ਥੋੜੇ ਥੋੜੇ ਖਰਾਬ ਹਨ ਜੋ ਵੀ ਆਂਦਾ ਤਾਂ ਇਹਨਾਂ ਦਾ ਮਾੜਾ ਮਾੜਾ ਖਲਾਸ ਹੈ ਉਹੀ ਵੀ ਅੰਦਰ ਲੈ ਕੇ ਨਾ ਸੁਣਿਆ ਕਰੋ ਬਾਹਰ ਲੈ ਕੇ ਨਾ ਸੁਣਿਆ ਕਰੋ ਆਹੀ ਗੱਲ ਕਹੀ ਹੈ ਖਰਾਬੀ ਹੈ ਇਹ ਸ਼ਬਦ ਨਹੀਂ ਹੁੰਦਾ ਭਾਈ ਦੂਆ ਸ਼ਬਦ ਹੁੰਦਾ ਉਹ ਸਾ ਸ਼ਬਦ ਹੁੰਦਾ ਉਹਨਾਂ ਨੇ ਸਮਝਿਆ ਹੈ ਯਾਰ ਉਹ ਪਖੜਵਾਦ ਨਹੀਂ ਕਿਹਾ ਹੈ ਆਮਾ ਨੂੰ ਬਿਲਕੁਲ ਰੱਦ ਕਰਕੇ ਰੱਖਿਆ ਬ੍ਰਹਮਤੋਂ ਪੈਦਾ ਹੋਇਆ ਹੋਇਆ ਜਿਹੜਾ ਸੈਂ ਉਹ ਬ੍ਰਹਮ ਉਹਦਾ ਸਾਰੇ ਬ੍ਰਾਹਮਣਾਂ ਨੇ ਫਿਰ ਤੁਸੀਂ ਪਿਆਰ ਨਾਲ ਕਿਵੇਂ ਜੇ ਅੰਦਰ ਹੱਲੇ ਵਲ ਆਏ ਜੇ ਅੰਦਰ ਵੀ ਤਾਂ ਉਹ ਬ੍ਰਾਹਮਣਾਂ ਅੰਦਰ ਹੱਲੇ ਵਲ ਆਏ ਤੇ ਸਾਰੇ ਬ੍ਰਾਹਮਣੇ ਨੇ ਹਾਂਜੀ ਜੇ ਤਾਂ ਸਾਰੇ ਬ੍ਰਾਹਮਣੇ ਨੇ ਜਿਹਨੇ ਆਦਮੀ ਦੇ ਪੈਦਾ ਹੋਏ ਜਿਹਨੇ ਆਨੰਦ ਦੀ ਲੱਗੀ ਹੋਈ ਹੈ ਨਾ ਦੋ ਚੀਜ਼ਾਂ ਦੇ ਦੋ ਰਸਤੇ ਨੇ ਲੇਵ ਤੇ ਦੋ ਰਾਹ ਹੈ ਕਿਹਾ ਤਾਂ ਬਲ ਦਰਦਾ ਆਪਣੀ ਮਰਜ਼ੀ ਚ ਫੁੱਲਾ ਘੋੜਾ ਹੈ ਆਪਣੀ ਮਰਜ਼ੀ ਨਾਲ ਚੋਦਾ ਮਰਜ਼ੀ ਚੋਂਦਾ ਜੇ ਤਾਂ ਘੋੜਾ ਬੰਨਿਆ ਹੋਇਆ 10 ਕ ਦੇ ਨਾਲ ਬੰਨਿਆ ਹੋਇਆ ਦਾਸਗਾਹ ਨੇਰੀਏ ਚੱਕ ਚੋਕ ਸਰਦਾਰ ਬੇਟ ਪਾਸਾ ਠੀਕ ਹੈ ਜੀ ਜੇ ਖੁੱਲਾ ਘਰ ਵੀ ਆਵੇ ਤੇ ਨਾ ਆਵੇ ਮੁਰਦੇ ਦੀ ਮਰਜ਼ੀ ਹੈ ਕੋਈ ਹੋਰੇ ਲੈ ਜਾਵੇ ਚੁੱਪੇ ਬਾਹਰ ਦਾ ਬਾਹਰ ਇਹ ਮਾਰ ਖੁੱਲਾ ਹੈ ਜਦ ਇਹ ਸੱਤ ਦੇ ਘਾਰੇ ਚ ਲਿਆਂਦਾ ਨੂੰ ਬੰਨਣ ਦੇ ਵਿੱਚ ਰਿਆਂ ਤਾਂ ਪੱਦਾ ਖੋਜ ਰਹਿ ਵਿੱਚ ਬੱਦੀ ਬੰਨਣ ਚ ਰੇ ਬੰਨਣ ਚ ਲੈ ਕੇ ਆਂਦਾ ਸਰੀਰ ਦੇਆਂ ਲੋੜਾਂ ਨੇ ਪਰ ਕਿਸੇ ਧਾਇਰੇ ਚ ਰਹੇ ਗੱਲ ਜੀ ਧਾਇਰੇ ਤੋਂ ਤੋਹਰੀ ਤੋੜਨਾ ਤਾਂ ਤਾਂ ਇਹਦਾ ਖੁੱਲਾ ਮਨ ਪਾਜਦਾ ਦੂਰ ਦੂਰ ਤੱਕ ਜਾਂਦਾ ਠੀਕ ਉੱਡੇ ਉੜਾਵੇ ਕੋਸਾਂ ਤੇ ਪਾਚੇ ਬਜਰੇ ਸ਼ਰਿਆ ਤਨ ਕਬਨ ਖਲਾਗ ਕਬਨ ਚੁਬਾਵੇ ਮਦਮੇ ਸਭ ਨੂੰ ਕਰਿਆ ਇਹ ਵੀ ਦੇਊਗਾ ਸ਼ਾਂਤੀ ਦੇ ਬੈਠਾ ਸਕਦੇ ਇਹ ਉਹ ਹੈ ਠੀਕ ਹੈ ਜੀ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਔਮੇ ਰੋਗ ਤਿਸ ਜਾਏ ਸਤਗੁਰ ਪੁੱਛਿਆ ਸਤਗੁਰ ਨੂੰ ਪੁੱਛੇ ਠੀਕ ਹੈ ਜੀ ਸੱਚ ਸੰਜਮ ਕਮਾਵੇ ਸੱਚ ਸੰਜਮ ਕਮਾਵੇ ਸੱਚ ਸਤੋਕਤ ਹੈ ਜਿਹੜੇ ਰਹਿ ਕੇ ਕਮਾਈਏ ਨੇ ਸਜੂ ਹੁੰਦਾ ਹੈ ਕਮੂਲਾ ਕਮਾਈ ਕਰਨੀ ਚਾਹੀਏ ਥੋੜੀ ਹੋਵੇ ਸੰਜਮ ਦੀ ਕਮਾਈ ਬਹੁਤ ਥੋੜੀ ਹੁੰਦੀ ਹੈ ਪਰ ਉਹਦੇ ਵਿੱਚ ਇਹ ਦੇਖਣਾ ਪੈਂਦਾ ਬਿਰੇਤੇ ਜੋ ਕਿੰਨੀ ਚੁਗਦਾ ਹੈ ਹੋਵੇ ਵੀ ਦਾਸੇ ਸਰੇ ਤਾਂ ਵੀ ਕਿਸਾ ਕੀਤੀ ਹੋਵੇ ਅੱਛਾ ਮੁਕਬਦੀ ਹੋਣੀ ਚਾਹੇ ਜਿੰਨੇ ਇੱਕ ਟੋਲਾ ਹੀ ਹੋਵੇ ਸਾਰਾ ਦਿਨ ਚੁਗੇ ਪਰ ਰੇਤਾ ਨਾ ਹੋਵੇ ਵਿੱਚ ਹੋਲੀ ਬਾਣੀ ਬੜੇ ਥੋੜੀ ਵਿਚਾਰੇ ਪਰ ਉਹਦੇ ਚ ਭਰਮ ਨਾ ਹੋਵੇ ਗਲਤ ਨਾ ਹੋਵੇ ਕੁਝ ਵੀ ਦਲਤ ਹੋਇਆ ਤਾਂ ਖਦਲਾ ਤਕੀ ਵੀ ਹੈ ਨੁਕਸਾਨ ਵੀ ਹੋ ਸਕਦੀ ਹੀ ਕੀਤਾ ਹੋਇਆ ਆ ਜੋ ਨੁਕਸਾਨ ਪੰਡਤ ਨੇ ਕਰਕੇ ਸਾਨੂੰ ਡੀਕੇ ਦਿੱਤਾ ਉਹ ਹੀ ਭੁਗਤ ਰਹੇ ਹਾਂ ਅਸੀਂ ਉਸੇ ਦੀ ਲੜਾਈ ਪਾਈ ਹੋਈ ਹੈ ਆਪਸ ਵਿੱਚ ਹੀ ਪਰ ਨੰਤਾ ਲੜਾਈ ਪਾ ਕੇ ਫਰੇ ਹੋ ਗਿਆ ਹਾਂ ਜੀ ਬਾਹਾਂ ਚੜੀ ਫਿਰ ਤੈ ਇੱਕ ਦੂਏ ਗੋਲ ਉਧਰ ਗੋਲ ਕਰ ਖਾਸਤੀ ਉਧਰ ਦੀ ਲੋੜ ਹੀ ਗੋਲ ਕਰਦੇ ਉਹ ਆ ਬੈਠੇ ਬੋਲੋ ਰੋਗ ਤਿਸ ਜੇ ਅੰਦਰ ਨੇ ਬਲਾ ਕੇ ਰੱਖੇ ਤਾਂ ਹੋ ਬਿਜਾ ਪਰ ਉਹ ਜਿਹੜਾ ਹੋਪੇਦਾ ਰੋ ਤਾਂ ਠੀਕ ਹੈ ਜੀ ਹਰ ਗੁਣ ਗਾਵੈ ਗੁਣ ਸੰਗਰੈ ਜੋਤੀ ਜੋਤ ਮਿਲਾਇ ਹਰ ਗੁਣ ਗਾਵੈ ਹਦੀਸ ਨੂੰ ਜਾਣੇ ਜੋ ਨੇ ਉਹ ਬਤੇ ਗੁਣਾਂ ਨੂੰ ਸੁਭਿਏਉ ਜੋ ਗਾਇਨ ਕਰੇ ਵਡਿਆਈ ਕਰੇ ਉਸਤੀ ਕਰੇ ਹਰ ਗੁਣ ਗਾਵੈ ਹਰ ਗੁਣ ਸੰਗਰੈ ਜਿਹੜੇ ਹਦੀਸ ਦੇ ਗੁਣ ਨੇ ਉਹ ਜਿਹੇ ਆਪਣਾ ਗੁਣ ਪੈਦਾ ਵੀ ਕਰੇ ਇਕੱਠੇ ਕਰੇ ਸੰਗਰ ਹੈ ਉਹਨੇ ਕਰਨਾ ਇਕੱਠਾ ਕਰਨਾ ਆਪਰੇ ਅੰਦਰ ਵੀ ਉਹ ਗੁਰੂ ਦਾ ਖਜ਼ਾਨਾ ਪੈਦਾ ਕਰੇ ਉਹੇ ਜਾ ਹੀ ਬਣਨਾ ਕਿ ਹੋ ਕਿਸੇ ਵੱਡੇ ਦਾ ਇੱਕ ਗੁਰਬਾਨੀ ਦਾ ਕੀ ਹੈ ਗੁਰਬਾਨੀ ਦਾ ਸੱਲੇ ਖ ਇੱਕ ਬਣਿਆ ਹੈ ਜਾ ਨੇ ਇਹ ਜਾ ਵੱਡ ਇਕ ਦਾ ਮੰਦਰ ਪਰਮੇਸ਼ਰ ਨਹੀਂ ਹੈ ਤੇ ਗਲਤ ਹੈ ਇਕ ਦਾ ਮਗਲ ਮੈਂ ਸਾਡੇ ਵਾਸਤੇ ਵਿਦੇਸ਼ ਹਰ ਆਦਮੀ ਨੇ ਇਕੱਲੇ- ਇਕੱਲੇ ਨੇ ਇਹੋ ਜਿਹਾ ਬਣਨਾ ਚਾਹੀਦਾ ਗੁਣ ਗੁਰ ਬਾਣੀ ਚ ਲਿਖਿਆ ਹੈ। ਤਾਂ ਗਏ ਗੁਣ ਸੁਧਰੇ। ਜਿਹੜੇ ਗੁਰਬਾਣੀ ਦੇ ਵਿੱਚ ਹੈਗੇ ਨੇ ਸਾਰਿਆਂ ਨੇ ਐਸੇ ਦਾ ਕਿਆ ਗਲਾਂ ਹਰ ਇੱਕ ਆਦਮੀ ਤੇ ਲਾਗੂ ਹੈ ਇਹ ਗੱਲ। ਹਰ ਇੱਕ ਤੇ ਲਾਗੂ ਹੈ, ਇੱਕੇ ਮਤਲਬ ਹਰ ਇੱਕੋ। ਪਹਿਲਾ ਬੂਆ। ਇਹ ਗੀ ਹਾਂ ਪਰਮੈਸ਼ਰ ਇੱਕ ਨਹੀਂ ਹੈਗਾ ਉਹ ਅਨੇਕ ਹਨ ਸਰੇ ਗਲ ਆਇਆ ਹੋਇਆ ਉਹਦੇ ਵਾਸਤੇ ਜਿਹੜਾ ਸਾਡਾ ਬੂਤਾ ਬਥਰੀ ਹੁੰਦੀਆਂ ਉਹਦੇ ਵਿੱਚ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾਏ ਰੱਖੇ ਜੋਤੀ ਕੀ ਹੈ ਜੋਤੀ ਕੀ ਹੈ ਜੋਤੀ ਹੈ ਜਿਹਨੂੰ ਦੀਵਾ ਕਹਿੰਨਾ ਨਾ ਦੀਵਾ ਹਾਂਜੀ ਉਹ ਜੋਤੀ ਹੁੰਦੀ ਹੈ ਕੀਵਾ ਮੇਰਾ ਇਤਨਾਮ ਦੁੱਖ ਵਿੱਚ ਪਾਇਆ ਤੇਲ ਉਹ ਚੰਨ ਜਿਹੜਾ ਚਾਨਣਾ ਉਹ ਜੋਤ ਹੈ ਜਿਹੜਾ ਦੀਵਾ ਹੈ ਉਹ ਜੋਤੀ ਹੈ ਜੋਤੀ ਪੈਦਾ ਹੋਈ ਹੋਈ ਚੀਜ਼ ਨਾ ਨਹੀਂ ਜੋਤੀ ਪੈਦਾ ਕਰਨ ਵਾਲੀ ਚੀਜ਼ ਸੂਰਜ ਜੋਤੀ ਹੈ ਉਹ ਜੋਤ ਹੈ ਜੋਤੀ ਉਹ ਹੈ ਜੋ ਜੋਤ ਪੈਦਾ ਕਰਦੀ ਹੈ ਜੋਤ ਹੈ ਨਾ ਜਿਹੜੀ ਉਹਦਾ ਉਹਦਾ ਮਾਂ ਪਿਓ ਜੋਤੀ ਹੈ ਉਦਾ ਵਜੂਦ ਜੋਤੀ ਜੋਤ ਦਾ ਵਜੂਦ ਜੋਤੀ ਕਰਕੇ ਵਾਪੇ ਉਹ ਆਇਆ ਉਹਦਾ ਹਾਲ ਮੇਰਾ ਪੁੱਤਾ ਤੂੰ ਮੇਰਾ ਮਾਤਾ ਠੀਕ ਹੈ ਉਹ ਪੈਦਾ ਹੁੰਦੀ ਹੈ ਜੋਤੀ ਜੋਤ ਬਣ ਆਏ ਜੋਤੀ ਪਹਿਲਾਂ ਆਇਆ ਜੋਤ ਬਾਅਦ ਆਇਆ ਸੋ ਪਹਿਲਾਂ ਜੋਤੀ ਸੀ ਜੋਤ ਬਾਅਦ ਪੈਦਾ ਹੋਈ ਜੋਤੀ ਵਿੱਚ ਜਿਹੜੀ ਪਹਿਲਾਂ ਚੀਜ਼ ਹੈ ਜੋਤੀ ਇਹ ਜੋਤ ਨੂੰ ਉਹਦੇ ਜਮਾਲ ਲੈ ਵਾਪਸ ਕਰ ਲੈ ਵਿਡਰਾ ਕਰ ਅੱਗੇ ਵਧ ਗਿਆ ਠੀਕ ਹੈ ਜੀ ਇਸ ਦਾ ਵਧਣ ਨੂੰ ਵੀ ਸੀ ਕਿ ਹਾ ਦੁਸ਼ਮਣ ਦੇ ਏਰੀਏ 'ਚ ਇਹ ਦੁਸ਼ਮਣ ਦਾ ਏਰੀਆ ਸਾਰਾ ਬਾਬ ਸਾਧਰ ਵਕਾਰਾ ਦਾ ਏਰੀਆ ਵਕਾਰ ਸਾਡੇ ਦੁਸ਼ਮਣ ਨੇ ਠੀਕ ਹੈ ਜੀ ਆਏ ਤੇ ਜਲ ਜੂਰ ਲਿਆ ਸੀ ਬਾਬ 'ਚ ਪਰ ਇੰਨਾ ਗਾਹ ਨਹੀਂ ਸੀ ਵੱਧਣਾ ਕਿ ਅਸੀਂ ਵਧ ਗਏ ਦੁਸ਼ਮਣ ਦੇ ਏਰੀਏ 'ਚ ਮੁੜ ਕੇ ਘਾ ਲੂਣੀ ਆਉਂਦੇ ਜੇ ਤੁਹੋਂ ਉੱਧਰ ਜੈਨਾ ਗਾਂ ਨਬਰੀ ਇਹ ਤੈਰ ਕੇ ਕਿ ਜੇ ਕਨਾਰੇ ਤੇ ਆਉਣ ਰਹਿਣ ਵਾਸਤੇ ਦੇ ਉੱਤੋਂ ਠੀਕ ਹੈ ਜੀ ਇਸ ਯੁਗਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਈ ਇਹ ਕਿਹੜੇ ਯੁਗ ਦੀ ਗੱਲ ਕਰ ਰਹੇ ਨੇ ਜਦੋਂ ਬਾਣੀ ਲਿਖੀ ਜਾ ਰਹੀ ਹੈ ਅਧਿਵੀਗਲ ਤਾਂ ਜਲਦੀ ਚੱਲ ਜਣਗੇ ਉਸ ਵੇਲੇ ਦੀ ਗੱਲ ਐ ਲੋ ਕੋਈ ਵਿਲਾਪ ਰਮ ਕੇ ਆਦੀ ਹੈ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਪਾਣੀ ਲਿਖ ਰਿਹਾ ਖੁਦ ਪਰਮਿਆਨੀ ਹੈ ਨਾਲ ਵੇਲਾ ਦਾ ਕੋਈ ਇੱਕ ਹੋਰ ਵੀ ਹੋਣਗੇ ਜ਼ਰੂਰ 2 4 10 5 ਹੋਣਗੇ ਜਿਹੜੇ ਗੱਲ ਸਮਝ ਦੇ ਤਾਂ ਵਿਲਾਪ ਕਿਹਾ ਨੇੜੇ ਤੇੜੇ ਸਮਝਣ ਵਾਲੇ ਸੀਬ ਤੇ ਹੋਰ ਵੀ ਇਸ ਜੋ ਜੋ ਮੈਂ ਕੋਈ ਵਿਲਗ ਵਰਗ ਗਿਆਨੀ ਵਰਗ ਗਿਆਨੀਆਂ ਦੀ ਫੌਜ ਨਹੀਂ ਹੁੰਦੀ ਉਹ ਵਿਲਲਾਵਲਾ ਹੁੰਦਾ ਤੇ ਦੇਨੇ ਲੈਵਲ ਤੇ ਜ਼ਰੂਰ ਸਮਝਦੇ ਹੁੰਦੇ ਨੇ ਬਰੰਗਿਆਦੀ ਦਾ ਮਤਲਬ ਇਹ ਨਹੀਂ ਜਿਹੜਾ ਸਮਝਾ ਦੇ ਸਕਦਾ ਉਹ ਵੀ ਬਰੰਗਿਆਦੀ ਹੁੰਦਾ ਉਹ ਗੁੰਗਾ ਹੁੰਦਾ ਪਰ ਉਹਨੂੰ ਗੁੰਭਾ ਕਹਿੰਨਾ ਕਿ ਉਹ ਗੁੰਭੇ ਕੋਲ ਖਾਇਆ ਉੱਤੇ ਤੇ ਕਹੀਏ ਉਹ ਸਮਝਾ ਆ ਸਕਦਾ ਸਮਝਿਆ ਹੋਇਆ ਹੁੰਦਾ ਉਹ ਜੱਜੂ ਦੇ ਸਿਰ ਤੇ ਛੱਡੀ ਰੱਖੀ ਸੀ ਉਸੇ ਤੇ ਗਿਆਨ ਸੀ ਗੁਰੂ ਸਾਹਿਬ ਦੇ ਸਾਹਮਣੇ ਸੀ ਇਹ ਸਭ ਨੇ ਸੂਰਜ ਦੇ ਸਾਹਮਣੇ ਕਿਦਰੋਂ ਚਮਕਦਾ ਚੰਗਾ ਨਹੀਂ ਲੱਗਦਾ ਕਰਦਾ ਸੀ ਗੱਲ ਜਾਣਦਾ ਸੀ ਸਾਰੀ ਗੱਲ ਉਹਨਾਂ ਨੇ ਸੱਚੇ ਰੱਖਤੀ ਨਹੀਂ ਬੋਲ ਆ ਗਿਆ ਤੇ ਜਦ ਆ ਗਿਆ ਦੇਤੀ ਗੋਲ ਫਿਰ ਬੋਲਣਾ ਪਿਆ ਜਾਨਤ ਥਾਈ ਇਸ ਯੁੱਗ ਮੈਂ ਕੋ ਬਿਰਲਾ ਗਿਆਨੀ ਜੇ ਹੋਮੈ ਨਹੀਂ ਜਾਂਦੀ ਜੋ ਹੋਮੇ ਮੈਂ ਸਮਾਏ ਹੋਮੇ ਨੂੰ ਵਟਾਲਵੇ ਆਪਣੇ ਸਮਾ ਨਹੀਂ ਸਕਦਾ ਹੁਣ ਕੀ ਆਉਂਦੇ ਸਮਾ ਗਿਆ ਛੱਡ ਕੇ ਸਮਾਉ ਨਾਮ ਦੇ ਵਿੱਚ ਸਮਾਉਣਾ ਤਾਂ ਉਹ ਵੀ ਛੇੜੀ ਪੈਣੀ ਤੋਬੇ ਸਮਾਏ ਠੀਕ ਹੈ ਹੋ ਜੀ ਅੱਗੇ ਆਨੰਕ ਮਿਲਿਆ ਸਦਾ ਸੁਖ ਪਾਈ ਹੈ ਜੋ ਅੰਦਰ ਹਲਨਾਮ ਆਇਆ ਜਿਹੜਾ ਦਿਨ ਰਾਤ ਹਲਨਾਮ ਦੇ ਵਿੱਚ ਧਿਆਨ ਰੱਖਦਾ ਹੈ ਹਲਨਾਮ ਦੀ ਗੱਲ ਕਰਦਾ ਉਹ ਨੂੰ ਜੇ ਮਿਲੇ ਬਿੱਲਗੇ ਸਦਾ ਸੁਖ ਪ੍ਰਾਪਤੀ ਹੋ ਸਕਦੀ ਹੈ ਪਰ ਜੇ ਅੰਦਰ ਭੁੱਖ ਹੋਵੇ ਭੁੱਖਾਲੇ ਨੂੰ ਹੋ ਸਕਦੀ ਹੈ ਜਿਹਨੂੰ ਭੁੱਖ ਨਹੀਂ ਮਾ ਜੀਣਾ ਠੀਕ ਹੈ ਮਹੱਲਾ ਤੀਜਾ ਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਈ ਆ ਵਰਗਿਆਨੇ ਦੂਏ ਗੁੱਡੀ ਵਾਲੇ ਅਚੰਦ ਕੜ ਦੇ ਵਿੱਚ ਜਿਹੜੇ ਮੰਦੇ ਨੇ 1008 ਵਾਲੇ ਬਲੂਗੀਆਂ ਦੀ ਠੀਕ ਹੈ ਜੀ ਦੀ ਵੀ ਮਾਰਕਟ ਹੈ ਮਾਰਕਟ ਦੇ ਵਿੱਚ ਇਹੀ ਮੰਦੇ ਨੇ ਬੰਦੇ ਨਹੀਂ ਹੁੰਦੇ ਇਹਨਾਂ ਤਾਂ ਫੋਜਾਂ ਨਹੀਂ ਫੋਜਾਂ ਲਾਰਾਂ ਦੇ ਨੇ ਇਹ ਇਰਾਦੇ ਤੋਂ ਸਮਾਜ ਹੈ ਪੂਰੀ ਅੰਦਰ ਦਾ ਕੱਫਾ ਅੰਦਰ ਗੱਪੀ ਨਾ ਬਨੂ ਖਣਾ ਗਿਆਨੀ ਨਾ ਗਿਆਨ ਕੋਈ ਨਹੀਂ ਪਰਮ ਗਿਆਨ ਕਰਾ ਸਮਾਜ ਵਾਲੇ ਪਰਮ ਗਿਆਨ ਕਰਾ ਕੇ ਦਿਖਾਉ ਗੁਰਬਾਣੀ ਕਹਿੰਦੀ ਹੈ ਅੱਗੇ ਵੀ ਸੀ ਤੁਸੀਂ ਹੁਣ ਵੀ ਹੈਗੇ ਹੋ ਕੋਨੋਂ ਆਨੰਦਾ ਅੱਗੇ ਕੀਤਾ ਸਰੂਆਣ ਦਾ ਹੁਣ ਕਰ ਰਹੇ ਆ ਅਸੀਂ ਗੁਰਬਾਣੀ ਕਰ ਰਹੀ ਹੈ ਅਸੀਂ ਗੁਰਬਾਣੀ ਦਾ ਖਲਾਸਾ ਹੀ ਕਰ ਰਹੇ ਹਾਂ ਤੁਰੇ ਨਾਮ ਕੇ ਕਰਤੇ ਗੁਰਬਾਣੀ ਨੇ ਬਚੋ ਦਸਨਾ ਝੂਠ ਬੁਲਾਇ ਝੂਠ ਬੋਲਦੇ ਸਾਰਾ ਝੂਠ ਹੈ ਬਿਲਕੁਲ ਸਚਾਈ ਨਹੀਂ ਕਹਾਣੀਆਂ ਸਾਖੀਆਂ ਸਾਖੀਆਂ ਦਾ ਮਾਇਆ ਦੀਆਂ ਨੇ ਮਾਇਆ ਦਾ ਝੂਠੀ ਐ ਝੂਠੀ ਮਾਇਆ ਜਸਤ ਬਣਾਇਆ ਗੁਰਬਾਣੀ ਨੂੰ ਹਰਥਾਓ ਗੁਰਬਾਣੀ ਨਾਲੇ ਕੋਣ ਤੇ ਤੋੜ ਜਾ ਕਿਸੇ ਦੁਵੇ ਦੇ ਹੱਥ ਜਾਨੀ ਖੰਦੇ ਕਿਉਂਕਿ ਉਹ ਵਰਮ ਤੇ ਨਹੀਂ ਪੈਦਾ ਹੋਇਆ ਕੀ ਬ੍ਰਹਮ ਵਿਦ ਤੇ ਉਹ ਵੀ ਪੈਦਾ ਹੋਇਆ ਤੁਸੀਂ ਮੱਖਾਂ ਕੇ ਬਿਠਾ ਸਕਦੇ ਹੋ ਪਹਿਰੀਆਂ ਕਿਵੇਂ ਲਵਾਉਂਦੇ ਹੋ ਉਹ ਤੇ ਉਹ ਵੀ ਤੁਹਾਡੇ ਵਰਗਾ ਹੀ ਹੈ ਕਿਆ ਫਿਰ ਨੇ ਉਹਨਾਂ ਨੂੰ ਦੀਦਾ ਹੈ ਤੇਰੀਆਂ ਵਾਲਿਆਂ ਨੂੰ ਤੁਸੀਂ ਅੰਨੇ ਹੋ ਉਸ ਚੱਖੇ ਤੁਹਾਡੇ ਸਜਾਖੇ ਨੇ ਤੁਸੀਂ ਅੰਨੇ ਹੋ ਅੰਨੇ ਫਿਰ ਤੁਸੀਂ ਹੋਇਆ ਗਿਆ ਜੇ ਤੁਸੀਂ ਹੋਏ ਹਾਂਜੀ ਸਪਟ ਕੀਤਾ ਨਿਤ ਵੇਖ ਸੁਣੇ ਸੁਭਾਈ ਕਾਪੜ ਕੀ ਚਾ ਪ੍ਰੋਕਿਆ ਕੋ ਲੋ ਹਰ ਪੁਰਖ ਕਦੇ ਵਿਸ਼ਵਾਸ ਨੀ ਕਰਦਾ ਤੂੰ ਜੇ ਰੱਬ 'ਤੇ ਭਰੋਸਾ ਕਰਨਾ ਜਿਹੜਾ ਭਰੋਸਾ ਕਰਨਾ ਕਪੀਆਂ 'ਤੇ ਕਦੇ ਵੀ ਪਰਮੇਸ਼ਰ ਦਾ ਭਰੋਸਾ ਨਹੀਂ ਕੀਤਾ ਹਰ ਪੁਰਖ 'ਤੇ ਭਰੋਸਾ ਨਹੀਂ ਕੀਤਾ ਕਦੇ ਕਪੀ 'ਤੇ ਭਰੋਸਾ ਕਰਨਾ ਭਗਤੀ ਹੈ ਗੁਰਮੁਖ ਤੋਂ ਅਗਜਕਤ ਕੋ ਰਜੀਵਾਲ ਨਹੀਂ ਹਾਂ ਕੱਪਟਨ ਦਾ ਅਸਲ ਮਤਲਬ ਇਹ ਹੈ ਕਿ ਮੈਂ ਬੱਲ ਕੋਈ ਨਹੀਂ ਰੱਖਦਾ ਉਹਦਾ ਸਿਰ ਵੱਡਿਆਂ ਨੂੰ ਉੱਤੋਂ ਉਹਦੇ ਨੂੰ ਹਾਂ ਉੱਤੋਂ ਨੂੰ ਵੱਡਿਆਂ ਨੂੰ ਕਪਟਨ ਕਹਿੰਦੇ ਨੇ ਉਹ ਵੱਡ ਨਹੀਂ ਸਕਦਾ ਉਦੋਂ ਕਾਹ ਨਹੀਂ ਇਹ ਸੱਤ ਕੀ ਕਰਦੇ ਨੇ ਜਿਹੜਾ ਇਹਨਾਂ ਦੇ ਅੜਕੇ ਅਜੇ ਉਹਦਾ ਗਿਆਨ ਐਸੇ ਕਿ ਨਾਲ ਘਟ ਦਿੰਦਾ ਨਾ ਗਾਂ ਖਾਲ ਦੀ ਬਦਲ ਦਿੰਦੇ ਵੀ ਸੱਤੋਂ ਜਿੱਦਣ ਗਿਆਨ ਵਾਲ ਹੋ ਗਿਆ ਸਾਡਾ ਪੜਦਾ ਚੱਕ ਦੂਗਾ ਐਸੀ ਸਿੱਖਿਆ ਐਸੇ ਰਾਹ ਪਾਉਂਦੇ ਨੇ ਉਹ ਗਿਆਨ ਵਾਲੇ ਰਾਹਕ ਜਾਣੇ ਨਹੀਂ ਦਿੰਦੇ। ਮਾਰਾ ਬਹੁਤਾ ਗਿਆਨ ਦੀ ਲੋੜ ਨਹੀਂ ਹੁੰਦੀ। ਜਿੰਨੇ ਕਪਤੀ ਨੇ। ਗਿਆਨ ਤੇ ਗੁਰਦੁਆਰੇ ਆਏ ਤਾਂ ਨਹੀਂ ਵੀ ਦਵਾ ਬਣਾਏ। ਐਡੇ ਦਰਸਾਂਤੀਆਂ ਨੇ ਜਿਹੜਾ ਹੋਣਾ ਪ੍ਰਚਾਰ ਉਹ ਵੀ ਇਹੀ ਕਹਿੰਦੇ ਸੀ ਬਹੁਤਾ ਗਿਆਨ ਦੀ ਲੋੜ ਨਹੀਂ ਹੁੰਦੀ। ਨਹੀਂ ਜਾਂਦੇ ਗਿਆਨ ਵੱਤੇ। ਹਾਂ ਨਿਤ ਵੇਖੇ ਸੁਣੇ ਸੁਭਾਈ ਤੇ ਆਪਾਂ ਦੇਖਦੇ ਹਾਂ ਸਾਰਿਆਂ ਆਪਣੇ ਸਭਾਂ ਹੀ ਨਾ ਕਰ ਰਹੇ ਜੋ ਕੁਝ ਉਹ ਜੋ ਕੁਝ ਕਰ ਰਹੇ ਨੇ ਉਹ ਸੁਭਾਅ ਆਪਾਂ ਜਾਣਦੇ ਜੀ ਕਿ ਕਪਟ ਕਰਦੇ ਨੇ ਝੂਠ ਬੋਲਦੇ ਨੇ ਕਿ ਇਹਨੇ ਕੁਝ ਨਹੀਂ ਕਰਦਾ ਕੁਝ ਨਹੀਂ ਲੈ ਕੇ ਹੜੱਪ ਜਾਂਦੇ ਨੇ ਲੋਕਾਂ ਦੀਆਂ ਅੰਦਾਸਾਂ ਕਰਾ ਲੈਂਦੇ ਨੇ ਥੋੜੇ ਆਹਾ ਕਰਾਇਆ ਜੀ 200 ਘੰਟਾ ਬਾੜ ਕਰਾਓ ਉਹ ਕਰਾਓ ਫਰਾਨਾ ਕਰਾਓ ਜਦ ਕਪਟੇ ਆਏ ਹੋਤੀ ਹੈ ਹਾਂਜੀ ਦੂਜੇ ਪਾਏ ਜਾਏ ਜਗ ਕੇ ਦੂਜੇ ਪਾਏ ਜਾਵੇ ਪਾਏ ਕੀ ਪਾਏ ਭੁੱਖ ਮਾਇਆ ਦੀ ਭੁੱਖ ਵੱਲ ਬੁੱਧੀ ਮਾਇਆ ਦੀ ਭੁੱਖ ਵੱਲ ਚਲੀ ਜਾਵੇ ਉੱਥੇ ਤਾਂ ਫਿਰ ਮਾਇਆ ਦੀ ਵਿਕਣ ਵਾਲੇ ਆ ਦੂਜੇ ਪਾਏ ਤਾਂ ਫਿਰ ਦੂਜੇ ਹੀ ਹੋਂਦ ਆ ਦੂਜੇ ਪਾਏ ਦੂਜੇ ਪਾਏ ਜਾਏ ਜਗ ਪ੍ਰਬੁੱਧ ਵਿਖ ਮਾਇਆ ਮੋਸ ਤvai ਦੂਜੇ ਪਾਏ ਦੇ ਵਿੱਚ ਜਾ ਕੇ ਜੇ ਜਗ ਪ੍ਰਬੁੱਧ ਦੇ ਭਾਵੇਂ ਭਾਵੇਂ ਗਿਆਨ ਦੇ ਦੇ ਜਗ ਪ੍ਰਬੁੱਧ ਦੇ ਗਿਆਨ ਗਿਆਨ ਦੇ ਦੇ ਰਹੇ ਕਿਡ ਕਿਡੇ ਮੰਦਰ ਬਣੇ ਨੇ ਗਿਆਨ ਦੇ ਰਹੇ ਕਿਡ ਕਿਡੇ ਮੱਥ ਪੜਿਆ ਨੇ ਗਿਆਨ ਦੇ ਮੇਰੀ ਗੁਰੂ ਘਰ ਸੇ ਬਰਾਬਰ ਦੀ ਸੀ ਸ੍ਰੀ ਜੀ ਜੀ ਬੈਠੇ ਗਿਆਨ ਦੇ ਰਹੇ ਜਿੱਕੇ ਬੁਲੀਆ ਜੀ ਸੀ ਗਿਆਨ ਦੇ ਰਹੇ ਤੇ ਰਾਮ ਰਹੀਏ ਗਿਆਨੀ ਜੀ ਦੇ ਰੇ ਪਰ ਦੂਜੇ ਪਾਸੇ ਤੇ ਉਹ ਜਗ ਤੇ ਜਾ ਕੇ ਪ੍ਰਬੋਧ ਦੇ ਜਹੇ ਕਰੇ ਜਾਂ ਦਵੇ ਦਿਖਵਾਇਆ ਮੂਸਾਏ ਚੋਰਪ ਕੀਆ ਅੱਜ ਦਾ ਜਿਹੜਾ ਸਾਡੀ ਸਿੱਖੀ ਆ ਉਤੋਂ ਉਹਨਾਂ ਦੀ ਸਿੱਖੀ ਹੈ ਗੁਰੂ ਘਰ ਦੀ ਸਿੱਖੀ ਦੀ ਤੇ ਦਿਖਵਾਇਆ ਮੂਸਾਏ ਠੀਕ ਪੂਰੀਆਂ ਕਰ ਉੱਡੇ ਬੁੱਗੜੇ ਅਰਦਾਸ ਤੇ ਚੱਲਦੀ ਉਹ ਇਹ ਸਭ ਉਥਰਾਂ ਦੀ ਹੋਈ ਸਿੱਖੀ ਹੈ ਗੁਰੂ ਘਰ ਦੀ ਸਿੱਖੀ ਨਹੀਂ ਹੈ ਗੁਰੂ ਘਰ ਦੀ ਸਿੱਖੀ ਤੋਂ ਖلاف ਹੁੰਦਾ ਉਹ ਬਿਰਲਾ ਬ੍ਰੰਝਾਂ ਦੀ ਕੋਈ ਹੋਰ ਕਹਿਣਾ ਹੁੰਦਾ ਇਹ ਜਿਹੜੇ ਹੁੰਦੇ ਨੇ ਬ huzoor ਕਹਿੰਦੇ ਉਸ ਤੇ ਇੱਟ ਸਦਾ ਦੁੱਖ ਪਾਵੈ ਜੰਮੈ ਮਰੈ ਫਿਰ ਆਵੈ ਜਾਇ ਕਿ ਐਸੇ ਕਮਾਈ ਕਰੂਗਾ ਨਾ ਦੂਜੇ ਪਾਇਦੀ ਜਿਵੇਂ ਕਰ ਰਹੇ ਨੇ ਸੰਤ ਵੀ ਕਰ ਰਹੇ ਨੇ ਇਹ ਕਮਾਈ ਦੇ ਵਿੱਚ ਸਦਾ ਦੁੱਖ ਪਾਊਗਾ ਇਹ ਕਮਾਈ ਸਦਾ ਦੁੱਖ ਪਾਏ ਦੁਖੀ ਹੁਣ ਵੀ ਹੁਣ ਵੀ ਨੇ ਐਵੇਂ ਭੁਲੇਖਾ ਅੱਜ ਮਰ ਜਾਣਾ ਐਨੇ ਵੀ ਕਿੱਥੇ ਭਰਾਂਗੇ ਅਸੀਂ ਅੰਦਰ ਇਹਨਾਂ ਦੇ ਚਿੱਤਾਂ ਜਿਵੇਂ ਭਰਾਂਗੇ ਕਿੱਥੇ ਜੋ ਝੂਠ ਬੋਲਦੇ ਆ ਸਭ ਪਤਾ ਝੂਠ ਬੋਲਦੇ ਆ ਕੱਪੜੇ ਕੱਢਦੇ ਕਿਤੇ ਪਤਾ ਨਹੀਂ ਉਹ ਭਾਈ ਹਤਬਾਦੀ ਜਿੱਦੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਅਸੀਂ ਗੱਲ ਇਹ ਆ ਕਿ ਨਹੀਂ ਸਭ ਤੋਂ ਪਤਾ ਜੇ ਤੁਸੀਂ ਨਹੀਂ ਖੁਦ ਨੂੰ ਤਾਂ ਪਤਾ ਅਪਰਾਧ ਹੁੰਦਾ ਦਾ ਘਟ ਘਟ ਕੇ ਅਪਰ ਕੀ ਜਾਣਦਾ ਹੈ ਹੀ ਹੈ ਜਮਾ ਮਰੇ ਫਿਰ ਆਵਾਜਾਉਣ ਨਾਲ ਪਤਾ ਸਾਡਾ ਜਮਨਬੰਦ ਨਹੀਂ ਛੁੱਟਣਾ ਪਤਾ ਨਹੀਂ ਕਿਹੜੀ ਬਹੁਤ ਮਾਰ ਨਹੀਂ ਸੀ ਜਮਾ ਮਰੇ ਫਿਰ ਆਵਾਜਾ ਠੀਕ ਹੈ ਜੀ ਉਹ ਤਾਂ ਫਿਰ ਸਾਰੇ ਆਦਮੀ ਹੋ ਗਏ ਫਿਰ ਇਹ ਆਦਮੀ ਹਮ ਸੱਚਾਈ ਹੈ ਇਹੋ ਸੰਤ ਨਹੀਂ ਬਣ ਕੇ ਵੱਲ ਕੇ ਇਹਨਾਂ ਤੇ ਕੁਝ ਕਫਾ ਕਿਹੜਾ ਥੋੜਾ ਜਿਹਾ ਲੱਗਿਆ ਹੋਇਆ ਇਹਨਾਂ ਤੇ ਧਾਰਾ ਲੱਗੀ ਜਗਤ ਕੋ ਲੋਗਨ ਕਾਲ ਕਾਤੀ ਕਟਿਓ ਬਾਸ ਨਰਕ ਬੌਨੀ ਤੇ ਅਤੇ ਆਦਫ ਦਾ ਜਨੂਸ ਵਾਰਨ ਦਾ ਲੋਕਾਂ ਨੇ ਜਿਹੜੀ ਗਲਤ ਉਪਦੇਸ਼ ਦੇਣ ਦੀ ਧਾਰਾ ਇਹਨੂੰ ਤੇ ਹੋਰ ਲੱਗੀ ਹੋਈ ਹੈ ਇਸਾ ਮੂਲ ਨ ਚੁੱਕਈ ਵਿੱਚ ਵਿਸ਼ਟਾ ਪਚੇ ਪਚਾਈ। ਅਦਾ ਹੋਣਾ ਚੁੱਕੀ ਉਹਨਾਂ ਦੇ ਅੰਦਰ ਉਹ ਜੋ ਕੋਕੜੀ ਕਰੇ ਵੀ ਫਸੇ ਨੇ ਵਿਸ਼ਟਾ ਦੇ ਵਿੱਚ ਕੀੜੇ ਨਾ ਵਿਸ਼ਟਾ ਜੇ ਰਹਿਣਗੇ ਵਿਸ਼ਟਾ ਜੇ ਜਬ ਨੇ ਵਿਸ਼ਟਾ ਜੇ ਮਰ ਜਾਂਦੇ ਨੇ ਕ੍ਰਿਸ਼ਟਾ ਦੇ ਕੀੜੇ ਨੇ ਕੀ ਗੱਲ ਕਹਿਤੀ ਕੀ ਕਹਿਆ ਯਾਰ ਆਖਾਲਿਆਂ ਨੂੰ ਹਾਂਜੀ ਜਿਸ ਨੂੰ ਕਿਰਪਾ ਕਰੇ ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੋਬੀ ਜੇ ਮੇਰਾ ਸੋਬੀ ਕਿਰਪਾ ਕਰਦੇਵੇ ਕਿਹਨਾਂ ਚੋ ਕੋਈ ਗੁਰਤੀ ਸਿੱਖ ਸੁਣਨਵੇ ਠੀਕ ਹੈ ਜੀ ਉਹ ਗੁਰੂ ਅਮਰਦਾਸ ਨੂੰ ਇਹਨਾਂ ਨੂੰ ਛੱਡ ਕੇ ਵੀ ਆ ਜਾਂਦਾ ਕਬੀਰ ਵਾਂ ਮਾਰਾ ਭਗਾ ਕੇ ਮਾਰਦਾ ਇਹ ਆ ਵੀ ਜਾਂਦਾ ਇੱਧਰ ਉਹ ਕਹਿੰਦਾ ਭੁੱਖੇ ਭੰਗਤਾਂ ਦੀ ਚੈਨ ਵਾਲਾ ਆਪਣੀ ਲੀਜਾ ਉਹ ਬਾਗੀ ਹੋ ਕੇ ਇੱਧਰ ਵੀ ਆ ਬੜਦਾ ਗੁਰੂ ਜਾਣਾ ਕਹਾਂ ਜਾਂ ਕੇ ਛਾਲ ਮਾਰ ਕੇ ਉਤਰੇ ਵਾਂ ਲੈ ਜਾਓ ਮੈਂ ਇੱਧਰ ਨਹੀਂ ਜਾਂਦਾ ਹਾਂਜੀ ਜਿਸ ਨੂੰ ਕਿਰਪਾ ਕਰੇ ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ ਗੁਰੂ ਨੇ ਸਿੱਖਿਆ ਸਮਾਉਂਦਾ ਸਿੱਖ ਲਵ ਦੇਖ ਲਵਾ ਗਿਆ ਸਿੱਖਿਆ ਇਹਦਾ ਸਿੱਖਿਆ ਬਣ ਗੁਰ ਕੀ ਚਕ ਸਾਰੇ ਜਿਨ ਗੁਰ ਦੀ ਉਪਦੇਸ਼ ਸਿੱਖਿਆ ਸਮਾਉਂਦਾ ਹੈ ਹਰ ਨਾਮੋ ਅੰਤ ਛਡਾਏ ਦਾਇਆ ਹੋਇਆ ਗੁਰਮੁਖ ਦਾ ਗੁਰਮੁਖ ਦਾ ਇਹ ਗੱਲ ਤਾਂ ਹੈ ਨਹੀਂ ਘਰੇ ਆ ਸਾਡੇ ਤਾਂ ਨਾਮ ਧਿਆਵੈ ਆ ਨਾਮ ਗਾ ਰੀਆ ਅੰਤ ਛਡਾਏ ਆ ਲੈਂਦਾ ਆਪ ਵੀ ਝੜ ਜਾਂਦੇ ਨੇ ਉਹਨਾਂ ਨੂੰ ਵੀ ਜਲਾ ਦਿੰਦੇ ਛੱਡਣ ਦਾ ਰਸਤਾ ਦੱਸ ਨੇ ਉਹ ਤਾਂ ਉਹਨਾਂ ਨੂੰ ਵੀ ਜਲਾ ਨੇ ਠੀਕ ਹੈ ਜੀ ਕੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਜਿਹਨਾਂ ਨੂੰ ਹੁਕਮ ਮਨਾ ਲਿਆ ਉਹ ਸੰਸਾਰ ਵਿੱਚ ਰਹਿੰਦੇ ਹੁੰਦੇ ਵੀ ਸਰੀਰ ਦੇ ਵਿੱਚ ਹੁੰਦੇ ਵੀ ਪੂਰੇ ਹੁੰਦੇ ਤੇ ਕੋਦਰ ਉਜਿਹੜਾ ਏਕਾ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਇੱਕ ਉਹ ਇੱਕ ਉਹੀ ਪੂਰੇ ਦੇ ਇਕਲਾ ਮਤਲਬ ਉਹਦਾ ਪੂਰਾ ਸਮਾਂ ਦੇ ਵਿੱਚ ਜਿੱਤ ਜਿਹੜਾ ਹੋ ਜਾ ਉਹਦੀ ਗੱਲ ਹੈ ਉਹ ਪਰਮੇਸ਼ਰ ਦੀ ਗੱਲ ਨਹੀਂ ਏਕਾ ਇਹ ਪਾਇਆ ਹੋਇਆ ਠੀਕ ਹੈ ਇਹ ਭਲੇਖਾ ਜਿੱਦਾਂ ਨਿਕਲ ਗਿਆ ਸਵਾਲ ਹੱਲ ਹੋ ਸਵਾਲ ਹੱਲ ਕੀਤਾ ਪਿਆ ਗੌਰੀ ਦੇ ਵਿੱਚ ਬਾਬਰ ਖਰੀਚਾ ਇਹ ਕਿਹਾ ਪਰਮੇਸ਼ਰ ਆਪ ਲਿਖਾ ਪਾਸਤਾ ਹੂ ਹਾਂਜੀ ਸਾਹਿਬ ਸੇਵਨੀ ਆਪਣਾ ਪੂਰੇ ਸ਼ਬਦ ਵਿਚਾਰ ਸਾਹਿਬ ਸੇਵਣਾ ਆਪਣਾ ਗੱਲ ਹੈ ਜਿਹੜਾ ਪੂਰੇ ਸ਼ਬਦ ਵਿਚਾਰ ਸ਼ਬਦ ਵਿਚਾਰ ਜੇ ਉਹਨਾਂ ਨੂੰ ਕੋਈ ਕੋ ਲੇਖਾ ਨਹੀਂ ਹੁੰਦਾ ਕਿ ਤੋ ਖਾਦਾ ਹੋਇਆ ਪੂਰੇ ਸ਼ਬਦ ਵਿਚਾਰੀ ਦੇਦੇ ਨੇ ਉਹਾਂ ਨੇ ਗੁਰੂ ਦੇਖ ਨੂੰ ਪੂਰੀ ਤਰ੍ਹਾਂ ਚੰਗੀ ਗੱਲਾਂ ਵਿਚਾਰ ਲਿਆ ਹੁੰਦਾ ਹੈ ਵਿਚਾਰ ਕੇ ਕਰਦੇ ਨਹੀਂ ਸਾਹਿਬ ਆਪਣੇ ਦੇ ਹੁਕਮ ਪਾਣੇ ਦੇ ਰਹਿੰਦੇ ਨੇ ਸਾਹਿਬ ਜੀ ਵੱਲੋਂ ਠੀਕ ਸ਼ਬਦ ਵਿਚਾਰ ਹਰ ਕੀ ਸੇਵਾ চাকਰੀ ਸੱਚੇ ਸ਼ਬਦ ਪਿਆਰ ਹਰ ਕੀ ਸੇਵਾ ਦੀ ਹੈ ਹਰ ਸੇਵਾ ਸੇਵਾ ਦੀ ਹੈ চাকਰੀ ਹੈ চাকਰੀ ਕੀ ਹੈ ਸੇਵਾ ਹੁੰਦੀ ਹੈ ਫਰੀ ਚਾਕਰੀ ਫਰੀ ਨਹੀਂ ਹੁੰਦੀ ਇਹਦਾ ਚੱਕਰ ਆ ਰੋਟੀ ਕਪੜਾ ਉਹਨਾਂ ਜੱਬੇ ਹੁੰਦਾ ਕਹਿੰਦਾ ਨਹੀਂ ਆ ਕੇ ਕਹਿੰਦਾ ਮੁੱਢਾ ਲਖ ਲਿਆ ਅਸੀਂ ਅਗੇ ਕੀ ਤਨਗਾ ਹੈ ਕਹਿੰਦਾ ਰੋਟੀ ਕਪੜਾ ਉਹ ਉਹ ਕਹਿੰਦਾ ਜੁੱਤੀ ਜੁੱਤੀ ਵੀ ਨਾ ਦੇਣੀ ਹੈ ਦੇ ਹੁਣ ਬੁੱਢੇ ਹਰੀਜਨ ਦਾ ਪਾਪ ਕਹੇ ਜਲਾ ਕਹਦਾ ਆਹ ਮੁੱਢਾ ਲਾਤਾ ਕਹਿੰਦਾ ਰੋਟੀ ਕਪੜਾ ਜੁੱਤੀ ਕਿਹਨਾਂ ਦੇ ਸਰ ਸਰ ਜਲਾ ਦੇ ਆਪਣੇ ਉਹਨਾਂ ਨੇ ਜਨ ਹਾਫਾਇਸ ਨਾਲ ਜੁੱਤੀ ਵਸਾਈ ਹੋਈ ਹੈ ਇਹ ਦਿਵ ਦੇਣੀਆਂ ਜੁੱਤੀ ਉਹਨਾਂ ਜਦੋਂ ਦੇ ਕੰਮ ਕਰਾਉਣਾ ਹੈ ਕਣਿਆਂ ਵਿੱਚ ਬਾਹਰ ਖੇਤਾਂ ਕਰਕੇ ਸਾਹਿਬ ਦੀ ਜਿਹੜੀ ਚੱਕਰੀ ਹੈ ਉਹ ਸਭ ਕੁਝ ਦਿੰਦਾ ਨਾਲ ਲੋੜਾਂ ਵਿੱਚ ਪੂਰੀਆਂ ਉਹ ਕਰਦਾ ਹੈ ਉਹਦੇ ਹੈ ਉਹਦੇ ਜੁੱਬੇ ਹਨ ਸੱਚੇ ਸ਼ਬਦ ਪਿਆਰ ਸੱਚੇ ਸ਼ਬਦ ਪਿਆਰ ਪਿਆਰ ਸੱਚੇ ਸ਼ਬਦ ਹੁੰਦਾ ਪਿਆਰ ਮਾਇਆ ਨਾਲ ਨਹੀਂ ਹੈ ਵੀ ਆ ਵਧੀਆ ਕੱਪੜਾ ਦੇਤਾ ਆ ਠੰਡਿਆ ਕੱਪੜਾ ਦੇਤਾ ਆ ਜਿੱਦਾ ਖਾਣਾ ਦੇਤਾ ਉਹ ਤੇਤਾ ਜਹਾਜਾ ਦੇਤਾ ਉਹਦਾ ਜ਼ਿਕਰ ਹੋਣਾ ਕਿੰਨਾ ਦੇਤਾ ਵਾਲਾ ਦੇਤਾ ਖਾਣ ਨੂੰ ਪੈਣ ਦੇਤਾ ਵਾਲਾ ਦੇਤਾ ਉਹਦੇ ਨਾਲ ਪਿਆਰ ਨਹੀਂ ਪਿਆਰ ਉਹਦੇ ਵਜਨ ਨਾਲ ਪਿਆਰ ਉਹਦੇ ਉਪਦੇਸ਼ ਨਾਲ ਸਾਤ ਨਾਲ ਪਿਆਰ ਨਹੀਂ ਹੈ ਸਾਤੇ ਨਾਲ ਪਿਆਰ ਹੈ ਮਨੁੱਖ ਕਵਣ ਸਾਤ ਪਿਆਰੀ ਇਹ ਦਾਤ ਪਿਆਰੀ ਹੋਗੀ ਦਾਤਾਰ ਬਿਸਰ ਯੂ ਜਿਨ੍ਹਾਂ ਨੇ ਦਾਤ ਨਾਲ ਪਿਆਰ ਕੀਤਾ ਦਾਤਾਰ ਬਿਸਰ ਕੇ ਜਿਨ੍ਹਾਂ ਨੇ ਦਾਤੇ ਨਾਲ ਪਿਆਰ ਕੀਤਾ ਦਾਤ ਪਤਾ ਹੀ ਨਹੀਂ ਗੁਰਦਾ ਫਟਿਆ ਹੋਇਆ ਫਟਿਆ ਹੋਇਆ ਕੋਈ ਨਹੀਂ ਉਹਨੂੰ ਵੀ ਪਤਾ ਹੀ ਨਹੀਂ ਹੈ ਜੀ ਹਰ ਮਹਿਲ ਤਿੰਨੀ ਪਾਇਆ ਜਿਨ ਹੌਮੇ ਵਿੱਚੋਂ ਮਾਰ ਹਰ ਨੇ ਪਾਇਆ ਹਰ ਮਹਿਲ ਜਿਨ੍ਹਾਂ ਨੇ ਮਾਰ ਕੇ ਤੜਦ ਨਾਨਕ ਗੁਰਮੁਖੀ ਮਿਲ ਰਹੇ ਜਪ ਹਰ ਨਾਮਾ ਉਰਤਾਰ ਨਾਨਕ ਗੁਰਮੁਖੀ ਮਿਲ ਰਹੇ ਇਹ ਨਾ ਗੁਰਮੁਖੀ ਨਾ ਹਾਂਜੀ ਇਹ ਗੁਰਮੁਖੀ ਬਹੁਵਚਨ ਆ ਵਾ ਇੱਕ ਵਚਨ ਨਹੀਂ ਐ ਇਹ ਰਹੇ ਰਹੇ ਅਬ ਰਹੇ ਨਹੀਂ ਜਿੰਨੇ ਗੁਰਮੁਖੀ ਨੇ ਜਿਹਾ ਜਾਲਮੀ ਦਾਦਾ ਜੀ ਵੀ ਹੁਣ ਇਕੱਠੇ ਹੋ ਮਿਲ ਕੇ ਜਿੰਨੇ ਨੇ ਇੱਕ ਜਗ੍ਹਾ ਹੀ ਰਹਿੰਦੇ ਨੇ ਖਾਲਸਾ ਇੱਕ ਜਗ੍ਹਾ ਰਿਹਾ ਅਤਨਤ ਕੋ ਸਾਵ ਲੜਾਈਆਂ ਜਿੰਨਾ ਲੜੀਆਂ ਦੀ ਦਸਾਰ ਹੈ ਕਿ ਕਿਤੇ ਬਾੜੇ ਦੇ ਬੂਰੇ ਹੋ ਕੇ ਤਕੜਾ ਆ ਜਾਂਦਾ ਤਾਂ ਵੀ ਮਾਰੇ ਨਾ ਹੈ ਪੁਛਾਵਾਂ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਕਰਦਾ ਠੀਕ ਹੈ ਐ ਮਿਲ ਕੇ ਰਹਿਣਾ ਤਗਰੂਗੀ ਜਦ ਕੇ ਥੱਲੇ ਜਪ ਕੇ ਹੀ ਨਹੀਂ ਹਿਰਦੇ ਵਿੱਚ ਧਾਣ ਨੂੰ ਵੀ ਜਪ ਕੇ ਹਿਰਦੇ ਵਿੱਚ ਧਾਣ ਨੂੰ ਲੜਨਾ 'ਚ ਕਿਆ ਬਹਾਰਨਾਮਾ ਉਰਤ ਮਨ ਨੂੰ ਹਿਰਦੇ ਚ ਬਸਾਉਣ ਜੋ ਗਿਆਨ ਅਸੀਂ ਲੈ ਲਿਆ ਗੁਰਬਾਨੀ ਦਾ ਸਮਝ ਲਿਆ ਉਹ ਹਿਰਦੇ ਚ ਬਸਾਉਣ ਬਿਸਾ ਕੇ ਰੱਖਣ ਠੀਕ ਹੈ ਜੀ